ਰਾਤਾਂ ਅਸਲ ਦੇ ਵਿੱਚ ਭੁੱਖ ਪੈਦਾ ਕਰਦੀ। ਨਾਮ ਦੀ ਭੁੱਖ ਪੈਦਾ ਕਰਦੀ। ਧਿਆਨ ਰੋਸ਼ੀਦਾ ਰਹਿਣਾ। ਉਹ ਸੀ ਚੀਜ਼ ਵੱਸ ਰਹਿਦਾ ਕਿ ਕੀ ਦੀ ਸਾਰੀ ਭੁੱਖ। ਜੇ ਤੇਜ ਪਿਆਸ ਲੱਗੀ ਹੋਈ ਹੈ। ਤਾਂ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਗੱਲ ਕੋਈ ਨਹੀਂ। ਗੱਲ ਵੀ ਕੋਈ ਕਰਦਾ ਹੈ ਕੋਈ ਖੇਡਦਾ ਵੀ ਹੈ ਪਰ ਉਹਦਾ ਧਿਆਨ ਬਾਣੀ ਤੇ ਇਹ ਬੁੱਖਣ ਉਹ ਕਹਾਂ ਧਿਆਨ ਦਰ ਵਿੱਚ ਪ੍ਰੀਤ ਵੀ ਅੰਨ ਚ ਕੋਈ ਗੱਲ ਹੋ ਜਾਂਦੀ ਹੈ ਜਿਸ ਭੁੱਖ ਪੈਦਾ ਕਰਦੀ ਹੈ ਪੈਦਾ ਉੱਤ ਵਾਲੀ ਜਿਹੜੀ ਪ੍ਰਕਿਰਿਆ ਉਹ ਰਾਤ ਰਾਦਰ ਰਾਦਰ ਦਿੱਕਾ ਹਰ ਹਰ ਰੋ ਰਾਦਰ ਆਉਂ ਆਉਂ ਵਲੇ ਆਉਂ ਵਲੇ ਨਾਉ ਕੋ ਵੀ ਨਾ ਹੋਰ ਕੁਝ ਤੇ ਧਿਆਨ ਹੀ ਨਹੀਂ ਹੁੰਦਾ ਤੇ ਲੋੜੇ ਨਹੀਂ ਹੁੰਦੇ ਤੇ ਇਹ ਸੰਤੋਖ ਤੋਂ ਬਾਅਦ ਹੀ ਤੁਖ ਪੈਦਾ ਹੋਈ ਪਹਿਲਾਂ ਨਹੀਂ ਸੰਤੋਖ ਧਾਰਨ ਕਰਨ ਦਾ ਮਤਲਬ ਹੈ ਨਾ ਕੋਈ ਕੁਖ ਪੈਦਾ ਕਰੀਏ ਸੰਤੋਖ ਯਾ ਬਿਚੇ ਛੱਡਾ ਗਏ ਜਿਹੜੀ ਖਾਦੇ ਆ ਨਹੀਂ ਖਾਵੇਂ ਤਾਨੀ ਨੂੰ ਭੁੱਖ ਤਾਂ ਬੜੀ ਜ਼ਿਆਦਾ ਭੁੱਖ ਹੈ ਭੁੱਖ ਨਹੀਂ ਵਾਰੀ ਹੈ ਭੁੱਖ ਨਹੀਂ ਬੁਰੀ ਹੈ ਭੁਖਦਾ ਭੁੱਖ ਬਿੜਾਉਣ ਦਾ ਆਧਾਰ ਬਣ ਜਾਉਂਦਾ ਹੈ ਕਦਾ ਭੁਕੇ ਉਹ ਭੁੱਖ ਨੂੰ ਉਤਰੀ ਉਤਾਰ ਦੀ ਸੀ ਭੁੱਖ ਛੱਡਣੀ ਤੁਰੀ ਗਿਆ ਦੇਸ਼ ਨਾਲੋਂ ਖੁ ਗਈ ਬਿਟੀ ਬਿਟੀ ਕੋਈ ਖਾਦੇ ਤੇ ਬਿਟੀ ਹੈ ਖਾਦੇ ਦੇ ਪੁਤਰੀ ਸਾਚੇ ਨਾਮ ਕੀ ਲੱਗਾ ਹੈ ਭੁੱਖ ਐਸੇ ਕਿ ਭੁੱਖ ਤਾਂ ਲਾਈ ਹੈ ਭੁੱਖ ਗਲਤ ਭੁੱਖ ਗਲਤ ਭੁੱਖ ਨਹੀਂ ਸੀ ਉਦੋਂ ਕੋਈ ਨਹੀਂ ਛੱਡੀ ਆ ਜਦੋਂ ਸਭ ਤਾਂ ਭੁੱਖ ਨਹੀਂ ਸੀ ਉਹ ਵੀ ਕੁਦਰਤੀ ਭੁੱਖ ਸੀ ਸਰੀਰ ਨੂੰ ਭੁੱਖ ਲੱਗੂਗੀ ਪਿਆਸ ਲੱਗੂਗੀ ਇਹ ਕੁਦਰਤੀ ਹੈ ਕੁਦਰਤੀ ਹੈ ਸਾਰਾ ਧਿਆਨ ਹੈ ਕਿ ਦਰਦ ਸਰੀਰ ਤੇ ਕਰ ਸਰੀਰ ਤੋਂ ਬਿਨਾਂ ਹੋਰ ਕੁਝ ਹੈ ਨਹੀਂ ਸਰੀਰ ਦੀ ਭੁੱਖ ਮੇਰੀ ਭੁੱਖ ਸਰੀਰ ਦੀ ਲੋੜ ਜਰੀ शरीर तो कहां अपने आप को समझ रही वो बिस्तर की भूख जो लेके आया सी ना ला वाली भूख वो बिस्तर ही हो गया उसे दा सम्भल ले और बारे ये से वो कराउदी ਜੇ ਜੋ ਤੂੰ ਇਕੱਠੇ ਕਰੀ ਜਾਣਾ ਭੁੱਖ ਦੇ ਇਲਾਜ ਹੈ ਦੁੱਖ ਦੇ ਇਲਾਜ ਇਹ ਨਾ ਤੇਰੇ ਨਾਲ ਜਾਣ ਦੀ ਸਾਧ ਜਿਹੜੇ ਤੂੰ ਬੱਠੇ ਅੱਗੇ ਵੀ ਆ ਜਾਊਗਾ ਜੇ ਉਹ ਭੁੱਖ ਨਾਲ ਉੱਥੇ ਭੁੱਖ ਲੈ ਕੇ ਵੀ ਆਇਆ ਉਹ ਲੈ ਕੇ ਆਇਆ ਕਾਦਰੂ ਆਇਆ ਕਾਦਰੂ ਭੁੱਖ ਲੈ ਕੇ ਆਇਆ ਜੇ ਨਹੀਂ ਉਹਦਾ ਇਲਾਜ ਕੀਤਾ ਭੁੱਖ ਨਾਲ ਚਲੀ ਗਈ ਪਰ ਹੋਰ ਚੀਜ਼ ਨੂੰ ਭੁੱਖ ਵੱਲ ਲਿਆਉਂਦਾ ਭੁੱਖੋਂ ਭੁੱਖ ਤੋਂ ਧਿਆਨ ਉਹ ਕੇ ਹੋਰ ਭੁੱਖ ਤੇ ਧਿਆਨ ਚਲਾ ਤੋਂ ਧਿਆਨ ਹਟਾ ਕੇ ਅਸਲੀ ਚੀਜ਼ ਤੇ ਧਿਆਨ ਲਿਆਉਣਾ ਅੱਜਾ ਨਾ ਗਿਆ ਭੁੱਖ ਬਸ ਜਿਹੜੇ ਬਿਸਰ ਗਈ ਸੱਚ ਬਿਸਰ ਗਿਆ ਜਿਹੜਾ ਇਹਨੂੰ ਜ਼ਬਰਦਸਤੀ ਹੋ ਗਈ ਬਿਸਰੇ ਦਾ ਭੁੱਲਿਆ ਭੁੱਲ ਗਿਆ ਉਹਨੂੰ ਤਾਂ ਜ਼ਬਰਦਸਤੀ ਘੱਟ ਰਹੀ ਸੀ ਉਹਦੀ ਜ਼ਬਰਦਸਤੀ ਆਉਂਦੀ ਹੈ ਸਰਦਾਰ ਦਾ ਸੋਨੂੰ ਜ਼ਬਰਦਸਤੀ ਮੈਂ ਕਿਹੜੀ ਭੁੱਖ ਲੈ ਕੇ ਆਇਆ ਸੀ ਕਿਹੜੀ ਭੁੱਖ ਮੈਂ ਪੂਰੀ ਕਰ ਰਿਹਾ ਹਾਂ ਇਸ ਕਰਕੇ ਸੰਸਾਰ ਦੇ ਬਾਜ਼ਾਰ ਦਾ ਅਸਲੀ ਮਸਲਾ ਦਾ ਰਾਜ ਨਹੀਂ ਕਰ ਰਿਹਾ ਅਸੀਂ ਕਿੰਦੂ ਹੋ ਰਿਹਾ ਹੈ ਉਹ ਉੱਥੇ ਖੜੀ ਹੈ ਉਹ ਜ਼ਿਦੜੀ ਉਹ ਖੜੀ ਤਾਹੀ ਕਿਹੜਾ ਖਲਾਜ ਆ ਪੈਦਾ ਰਹਿੰਦਾ ਹਰ ਇੱਕ ਵਿਅਕਤੀ ਦੇ ਬਣਿਆ ਰਹਿੰਦਾ ਉਹ ਤਾਂ ਉੱਥੇ ਹੀ ਹੈ ਉਹ ਤਾਂ ਹੀ ਰਾਜ ਨਹੀਂ ਕੀਤਾ ਭੁੱਖ ਕੀ ਹੈ ਭੁੱਖ ਕੀ ਹੈ ਜਿਹੜੀ ਲੱਗਿਆ ਹੋ ਗਿਆ ਕੁਝ ਇਹਦਾ ਘਾਟਾ ਪੈ ਗਿਆ ਚਲੋ ਘਾਟਾ ਵੀ ਪੈ ਗਿਆ ਜਾਦਾ ਜਲੂ ਘਾਟਾ ਬੈਜ ਦੋ ਦਿਨ ਤੈਨੂੰ ਭੁੱਖ ਮੈਨ ਖਲਾਫ ਹੈ ਨਾ ਹੁੰਦਾ ਫਿਰ ਥੱਲੇ ਗਿਰਦਾ ਖਲਾਫ ਹੈ ਨਾ ਹੋ ਗਿਆ ਤੇ ਉਹ ਅਵਸਥਾ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਫਿਰ ਉਸੇ ਅਵਸਥਾ ਤੇ ਜਾ ਗਏ ਆਪਣਾ ਸੀ ਰਾਜ ਚਲਾਇਆ ਬਿਖਾਰੀ ਹੋ ਗਿਆ ਹੈਗਾ ਰਾਜ ਐਸਾ ਦਾ ਰਾਜ ਲੈ ਕੇ ਉਹ ਖਲਾ ਪੂਰਾ ਕਰੂ ਜੀ ਇਹਨਾਂ ਕਰੂਰ ਹੋ ਜੀ ਇੱਥੇ ਵੱਡਾ ਬਣ ਕੇ ਬਰਾਖਾਂ ਦੇ ਕਬਜ਼ੇ ਕਰਕੇ ਜੀ ਵੀ ਦੇ ਕਬਜ਼ੇ ਕਰਕੇ ਦੇਸਾਂ ਦੇ ਕਬਜ਼ੇ ਕਰਕੇ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਚਲਾ ਕੇ ਵੱਡਾ ਹਸਤ ਬਣ ਕੇ ਉਹ ਜਿਹੜੀ ਖਲਾਏ ਉਹ ਭਗਤ ਚੌਧਾ ਉਹ ਹੀ ਬਣ ਪੰਡਤ ਸੂਰ ਚਦਰਪਤ ਰਾਜਾ ਫਤ ਬਰਾਬਰ ਹੋ ਰਿਹਾ ਏਵੇਂ ਤੋਂ ਵੱੜੇ ਛੇਤਰਪਤੀ ਰਾਜਾ ਵੱੜੇ ਤਾਂ ਵੀ ਭਗਤ ਪ੍ਰਾਪਰਦੀ ਇਸ ਕਰਕੇ ਭਗਤ ਵੱਡ ਜਾ ਕਹਿਣ ਤੋਂ ਹੋਰ ਨਵੇਂ ਆ ਹਾ ਭੱਤਕੇ ਮੇਂ ਬਣੇਗਾ ਭਗਤ ਤੇਰੇ ਅੰਦਰ ਹੈ ਭਗਤ ਅੰਦਰ ਉਹਦੀ ਬਗਲ ਆ ਜਾ ਜੇ ਘਰ ਦੇ ਵਿੱਚ ਚੱਲਣ ਲੱਗ ਜੂਏ ਬਦਲ ਲੱਗ ਜਵੇ ਸਾਰੇ ਅਕਲਾ ਬੁੱਧੀ ਐਰ ਬਲ ਭਗਤੀ ਬਦਲ ਲੱਗ ਜਾਣ ਤਉ ਫਖ ਤੋਂ ਨਾ ਹੋ ਗਿਆ ਰੇਕੋ ਤਾਂ ਨਾ ਹੋ ਗਿਆ ਤੇ ਚੱਲਦੀ ਹੁੰਦੀ ਐ ਜੇ ਉਹਦੀ ਨਹੀਂ ਚੱਲਦੀ ਮੈਂ ਖਲਦ ਦਾ ਨਾ ਹੋ ਗਿਆ ਮੈਂ ਬਰੋਦੀ ਦਾ ਨਾ ਹੋ ਗਿਆ ਬਸ ਆਹੀ ਗੱਲ ਜਿੱਦ ਤਣ ਉਹਦੀ ਚੱਲਣਾ ਹੀ ਉਧਰ ਧਾਰੇ ਕੋ ਤੋਂ ਹਾਲਾਂਕਿ ਬੰਨੇ ਪਹਤ ਨਹੀਂ ਹੋਣਾ ਪਰ ਇਹ ਕੇਵਲ ਗੁਰੂ ਕੋਦੀ ਫੱਲ ਲੱਗ ਤਾ ਤਰੀਓੜ ਭਗਤ ਦੇ ਪਿੱਛੇ ਲੱਗਦੇ ਨੇ ਭਗਤ ਦਾ ਹੈਗਾ ਇਹੋ ਭਗਤ ਦਾ ਹੈਗਾ ਇਹ ਕੋਈ ਬਦਰ ਹੈ ਕੋਈ ਉਧਰ ਹੈ ਔਰ ਜਿਹੜੀ ਵਧੀਰ ਚ ਗੱਲ ਐ ਨਾ ਜਿਹੜੀ ਉਹਦੀ ਮਰਜੀ ਐ ਭਗਤੀ ਇੱਛਾ ਐ ਉਹਦੇ ਖਰਚਾ ਜੀਵਨ ਜਿਉਂਗਾ ਤੇਰੇ ਭਗਤ ਤੇਰੇ ਭਗਤ ਉਹਨੇ ਗੁਰਧਾਰਨ ਹੋਵੇ ਆਪਣੀ ਵਧੀ ਛੱਡਦਾ ਆਪਣੀ ਵਧੀ ਕਿਵੇਂ ਜੇ ਬਸੇ ਹੋਰ ਇਹਦਾ ਮਾਹੀ ਉੜੋ ਸੁੰਦਰ ਔਲ ਜਿਹੜਾ ਹਿਰਦੇ ਚ ਵੱਸਦਾ ਬਾਹ ਨਹੀਂ ਉਹ ਖੰਘੇ ਦੀ ਦੇਖਦਾ ਉਹ ਦਰੇ ਰਹਿਣਾ ਮਨ ਦੇ ਵਿੱਚ ਵੱਸਦਾ ਹੈ ਅਰੇ ਦਬੋ ਬੁੱਧਾ ਜਿਹੜਾ ਰਹਿੰਦਾ ਉਹ ਬੁੱਧਰ ਜਿ ਮਨ ਬੁੱਧਰ ਜਿ ਮਨ ਬੁੱਧਰ ਦਾ ਤਾਂ ਵੜੀ ਗਿਆ ਇਹ ਸਦੀ ਬੜੀ ਵੱੜਦੀ ਹੈ ਬਾਸ ਗੋਰ ਬੜੀ ਬੱਠ ਕੋ ਲੋਗਰ ਉਸਰਵਾ ਨਾ ਜੇ ਤੂੰ ਹੋਰ ਕਹਿਤਾ ਤੇ ਇਹਨਾਂ ਨੇ ਬੜੀ ਕਹਿਤਾ ਤੂ ਉਥੇ ਸਰੀਰ ਦੀ ਬਰੋਦ ਹੈ ਗੋਰ ਰਬੜੀ ਵਿਜੀਬਲ ਅਨਾਖਰ ਨੂੰ ਦੀਦੀ ਹੈ ਜੋ ਚੀਜ਼ ਆਬਰ ਮਿਆ ਖੰਨੂ ਦੇ ਦੀਏ। ਭੜੀ ਵੀ ਅਖਰ ਮੂ ਦੇ ਦੀਏ। ਸ਼ਰੀਰ ਵੀ ਅਖਰ ਮੂ ਦੇ ਸ਼ਰੀਰ ਦੀ ਜਗ੍ਹਾ ਹੋ ਬਲੀ। ਇਹ ਫਿਰ ਅਕੈਡੈਮਿਕ ਫੋਟੋ ਆਉਣੀ ਤੇ ਫੋਟੋ ਬਲੋਗ ਰੋਥੇ ਵੀ ਸ਼ਰੀਰ ਦੀ ਉਹਦੂ। ਗੱਲਾਂ ਜਾਇ ਬਜਾਰਤਾ ਰੱਜੀ ਕਰਨਗੇ। ਗੱਲਾਂ ਤਾਂ ਬਜਾਰਤਾ ਰੱਜੀ ਕਰਨਗੇ। ਪਰ ਦੇਖਣ ਵਾਲੀ ਚੀਜ਼ ਤਾਂ ਸ਼ਰੀਰ ਹੈ ਉਹਦਾ। ਉਹ ਲੈ ਕੇ ਚਲਦੇ ਰਹੋ ਜਿਹੜੇ ਦੋਹਾਂ ਨੂੰ ਲੈ ਕੇ ਚਲਦੇ ਰਹੇ ਇਹ ਆਤਾ ਉਹ ਜਿਹੜਾ ਸੀ ਗੁਰੂ ਕਹ ਲੋ ਕਹੋਦਾ ਸੀ ਉਹ जोड ਸੀ ਕਾਚਾ ਸਰੀਰ ਸੀ ਕਿਸੇ ਨਾਲ ਜੋੜ ਲਿਆ ਆਪਣੇ ਸਰੀਰ ਕਾਚਾ ਉਹ ਜਿਹੜਾ ਇਹ ਜ਼ਚੇਰੇ ਪੂਰੇ ਕਹਾ ਕੋਝੋੜੇ ਨੂੰ ਸਮਝ ਲੈ ਕਹਿੰਦੇ ਕੱਚੇ ਸਰਦੇ ਕੱਚੇ ਕੱਚੀਆਂ ਗੋਸ ਅਜ਼ਲ ਦੇ ਗੁਰੂ ਪੱਕੇ ਤੇ ਸਿੱਖ ਕੱਚੇ ਸਮਝੇ ਨਹੀਂ ਉਹਦੀ ਗੱਲ ਬਾਣੀ ਪੱਕੀ ਹੈ ਆ ਬਾਣੀ ਪੱਕੀ ਹੈ ਸਾਡੀ ਬੋਲੀ ਕੱਚੀ ਸਾਡੀ ਬੋਲੀ ਕੱਚੀ ਹੈ ਨੇ ਬੋਦੇ ਬੋਦੇ ਇਹ ਬਾਣੀ ਪੱਕੀ ਆ ਸਾਡੀ ਬੋਲੀ ਕੱਚੀ ਤੇ ਕੱਚੀ ਬੋਲੀ ਨਾਲ ਪੱਕੀ ਬਾਣੀ ਦਾ ਅਸਰ ਕੱਚੀ ਭਾਸ਼ਾ ਜਾਣਦੇ ਆ ਪੱਕੀ ਭਾਸ਼ਾ ਦਾ ਸਾਡੀ ਦਿੱਤੀ ਪੈ ਕਰਦੇ ਉਹਨਾਂ ਜਿਹੜਾ ਸੀ ਉਹਦੀ ਪੱਕਾ ਤੇ ਪਹਿਲਾਂ ਦਾ ਆਪੇ ਜੀ ਪੱਕਿਆ ਸਿੱਖੇ ਨਹੀਂ ਬਣ ਸਕਦੇ ਉਹਨਾਂ ਕਿ ਸਭ ਜਿਹੜੇ ਨਾਲ ਹਬਦੇ ਨੂੰ ਸਮਝਣ ਦੇ ਸੇਸ ਦਾ ਇਹ ਗੱਲ ਹੈ ਜਿਹੜੀ ਸਾਨੂੰ ਸਮਝੇ ਨਹੀਂ ਲੱਗੀ ਉਹ ਟਾੜ ਦੇ ਬਕਰਾਂ ਸਭਿਧਾ ਗਲ ਉੱਢ ਲਈ ਰੱਖਿਆ ਦੇ ਤੌਰ ਤੇ ਪੁੱਠਾ ਪਾ ਲਿਆ ਕੱਲ੍ਹੇ ਆਪਾ ਤੋਂ ਤਾਂ ਸਭ ਹੋ ਗੋ ਯਾਰ ਬਿਟੇ ਹੋਊਗਾ ਜੇ ਤਾਂ ਘਣ ਉੱਪਰ ਕਰਤਾ ਜਾ ਕੇ ਉੱਤਰ ਵਾਲੇ ਤੋਂ ਅਵਰ ਪਛੋੜਿਆ ਬੇਦਰਜਾ ਜਿਹੜਾ ਪੁਰਬੀ ਦਰ ਹੋ ਜਾਣਾ ਬੁਰ ਪੱਜ ਵੀ ਤਾਂ ਬਦਲ ਲਗਈ ਇਹ ਬਦਲ ਗਿਆ ਸਾਰਾ ਹੀ ਕੱਚਾ ਸਾਰੇ ਹੀ ਬਦਲ ਗਿਆ ਕੱਚੀ ਬਾਣੀ ਥੱਲੇ ਸੀ ਪੱਕੀ ਬਾਣੀ ਉੱਤੇ ਸੀ ਪੱਕੀ ਥੱਲੇ ਕਰਦੀ ਕੱਚੀ ਉੱਤੇ ਕਰਦੀ ਮੁਰਾਖੇ ਵਾਲੀ ਸਾਰੇ ਦੇ ਸ਼ਾਬਾਹ ਬਦਲ ਗਏ ਸਾਰੇ ਲੋਕ ਬਦਲ ਗਏ ਸਾਰੇ ਪਦਾਰਥ ਬਦਲ ਗਏ ਸਾਰੇ ਲੋਕ ਬਦਲ ਗਏ ਸਾਰੇ ਸਾਰਾ ਭਾਸ਼ਾ ਜੀ ਬਦਲ ਗਿਆ ਰਗ ਬਦਲ ਗਿਆ ਸਿਮਰਟ ਬਦਲ ਗਿਆ ਜੱਬ ਬਦਲ ਗਿਆ ਤੱਪ ਬਦਲ ਗਿਆ ਧਾਨ ਬਦਲ ਗਿਆ ਪਨ ਬਦਲ ਗਿਆ ਅਕੀਰਤ ਬਦਲ ਗਏ ਹਰੇਕੋ ਸਭ ਬਦਲ ਗਿਆ ਬਦਲਿਆ ਤਾਂ ਸਭ ਕੀ ਗੱਲ ਦਾ ਸਿੱਖਾ ਲੋਣੀ ਬਿਲਕੁਲ ਹੈ ਤਗੋ ਦੀਰਤ ਬਣਾ ਲੇ ਰਹਾ ਹੋਰ ਜਿਹੜੇ ਛੜਾਏ ਤੋਂ ਬਣਾ ਰਹੇ ਹੋਰ ਬਣਾਈ ਜਾਂਦੇ ਰਹ ਗਲਬ ਆਉਦੀ ਗੋੜਊਗਾ ਕਪੱਖੇ ਰੌਣਗੇ ਜਿਆਲੜ ਕੇ ਦੀ ਭੀੜ ਹੁੰਦੀ ਹੈ ਭਲ ਕੀ ਦੇ ਵਰਤਦੀ ਜਾ ਰੋ ਆਇਆ ਹੈ ਰੂਡੋ ਜੇ ਬਸੇ ਹੋਰੇ ਨਮਾਹੀ ਕਿਹੜਾ ਰੇਤ ਵਿੱਚ ਬਸਿਆ ਹੋਇਆ ਉਹਨੂੰ ਰੂਡੋ ਕਹਿੰਦੇ ਨੇ ਸੰਗਤ ਤਾਂ ਫੇਰ ਵੀ ਜਿਹੜੇ ਜਿਹੇ ਪਾਲਕੇ ਜਿਹੇ ਸੰਗਤ ਤਾਂ ਫੇਰ ਵੀ ਸੰਗਤ ਮੱਖੀ ਦਾ ਹੈ ਨਹੀਂ ਸੰਗਤ ਤਾਂ ਦੇ ਰਹੀ ਹੈ ਤੁਹਾਨੂੰ ਦੇ ਰਹੀ ਹੈ ਪਰ ਜਿਹੜੇ ਮੱਖੀ ਬਣੇ ਹੋਏ ਨੇ ਦੂਜੇ ਜਿਹੜੇ ਉਹ ਦੇ ਕਿਉਂ ਰਹੇ ਸੰਸਾਰਿਕ ਉਹਨਾਂ ਵਾਲੇ ਬੜਕੇ ਵਿਚਾਰਧਾਰਾ ਕਰਕੇ ਦੇ ਰਹੇ ਜੀ ਔਰਤ ਨਹੀਂ ਜੋ ਜੇ ਤੋ ਔਰਤ ਨੂੰ ਸਾਰੀ ਲਾਭ ਨਹੀਂ ਹੈ ਔਰ ਦੋਸਤਾਂ ਰੋਡੀਆਂ ਚੀਜ਼ ਬਿਲਕੁਲ ਨਹੀਂ ਇੱਥੇ ਸੰਸਾਰੀ ਲਾਭ ਦੀ ਗੱਲੇ ਨਹੀਂ ਇੱਥੇ ਜਿੱਤੇ ਵੀ ਧਰਮਲੇ ਜਿੱਦਿਆ ਵੀ ਉੱਥੇ ਜਿਹੜਾ ਚਰਤਰੂ ਸਭ ਚ ਆਦਮੀ ਉਬੜੀਆਂ ਦੇ ਗੱਡਜੋਗ ਦੇ ਵਿੱਚ ਸਭ ਔਰਤਾਂ ਦੇ ਜਲਾ ਵਿੱਚ ਧਰਿਆ ਚਰਤਰ ਧਰਿਆ ਚਰ ਇਤਰਾ ਦੇ ਵਿੱਚ ਜਿੱਦਿਆ ਜਿਹੜਾ ਚਰਤਰ ਸਭ ਜਨਾਨੀਆਂ ਧਰਮ ਜਨਾਨੀਆਂ ਦਾ ਪਗੜ ਮੂਰੇ ਕਾ ਆਲੂਏ ਕਾ ਜਨਾਨੀ ਅੱਜ ਤੱਕ ਔਰਤ आर्बिट्र तो या राज तो भ्रष्ट करने वास्ते बिज़्यूज कीत हो गया हो जज बिज़्यूज कीता जाता है पितादा बिज़्यूज कीत गया आर्बिट्र रणजीत से वास्ते बिज़्यूज नहीं होया सियासत के सब थल्ले डगना होवे ये तर्क तो थल्ले डगना होवे बस ਉਹ ਜਗ੍ਹਾ ਇਹਦਾ ਬਿਸਯੂਜ਼ ਕੀਤਾ ਗਿਆ ਇਹਦਾ ਕ ਹਥਿਆਰ ਵਜੋਂ ਵਰਤਿਆ ਗਿਆ ਇੱਕ ਜਗ੍ਹਾ ਬਾਰੀਚ ਵਰਤਿਆ ਗਿਆ ਆਦਮੀ ਨੂੰ ਆਲਬੋਤ ਕੱਢੇਗਾ ਵਰਤਿਆ ਆਦਮੀ ਕੁਮਾਰੀਚ ਰਿਸ਼ੀ ਹੈ ਹਥਿਆਰ ਦੇ ਤੌਰ ਤੇ ਉਹਨੂੰ ਵਰਤਿਆ ਗਿਆ ਔਰ ਵਰਤਿਆ ਉਹਨੂੰ ਰਾਵੜ ਫਿਰ ਉਹ ਬੰਨਦਾ ਨਹੀਂ ਪਰ ਕੜੇ ਆ ਵੀ ਕਰਦਾ ਤੇਰੇ ਨੀਚ ਦੇ ਹੱਥੋਂ ਮਾਰਨ ਕੋਸ਼ਿਸ਼ ਕਰੂਗਾ ਇਹ ਦਲੀਲ ਦਿੱਤੀ ਪਰ ਉੱਥੇ ਕਹਿੰਦੇ ਇਹ ਰਹਿ ਗਿਆ ਔਰ ਆਪ ਨੂੰ ਜਾ ਕੇ ਲਾਹ ਦਿੱਤਾ ਔਰ ਦੂਰ ਬਟਕ ਅਸਲ ਤੇ ਦਿੱਖ ਵੀ ਆ ਇਸ਼ਾਰਾ ਦੇ ਗਿਆ ਇਸ਼ਾਰਾ ਦੇ ਮੇਰਾ ਮਤ ਆ ਨੇ ਫਿਰ ਵੀ ਬੰਨਿਆ ਵੀ ਇਹ ਕੰਮ ਨਹੀਂ ਕਰਦਾ ਜੀ ਆਇ ਵਾਲਾ ਉਹ ਕਹਿੰਦਾ ਸਾਹਿਬ ਜਾ ਇਹ ਕੰਮ ਕੌਣ ਨੇ ਛੇ ਜਣੀ ਕਹਿੰਦਾ ਲੇਪੜੇ ਦੇ ਬਾਪ ਨੂੰ ਡੇ ਬੋੜੇ ਨਿਵਾਹ ਉਹ ਪਹਿਲਾ ਅਬੀਦੂ ਸਾਹਿਬ ਜਾਦਿਆਂ ਨੂੰ ਲੈ ਜਾ ਅੱਛਾ ਅਭੀ ਦੋ ਤੇ ਲੈ ਜਾ ਕੇ ਮਾਰਦੀ ਆਪਣਾ ਬਦਲਾ ਲੈ ਲੈ ਭਾਈ ਦਾ ਉਹ ਕਹਿੰਦਾ ਮੈਂ ਕਲੰਕ ਲਾਉਣ ਲੈ ਆਪਣਾ ਜੋਕਰ ਉਾਰ ਕੇ ਭਾਈ ਬਰਾਬਰ ਹੈ ਜੰਗ ਚ ਮੈਂ ਕਲੰਕ ਲਵਾਉਂ ਮੈਂ ਕਲੰਕ ਲਵਾਉਂ ਹਰਿਏ ਕੰਮ ਕਰਦਾ ਤੇ ਉਹ ਪਾਗਲ ਉਹਨੂੰ ਪਤਾ ਹੀ ਨਹੀਂ ਕਿ ਮੈਂ ਕਲੰਕ ਲਵਾਉਂ ਬੱਚਿਆਂ ਨੂੰ ਮਾਰੂ ਉਹ ਉਹ ਕੋਈ ਗੱਲ ਨਾ ਨਾ ਨਾ ਉਦੋਂ ਤੇ ਛੱਡਣ ਦੀ ਗੱਲ ਹੋ ਗਈ ਸੀ ਆਖਰੀ ਵਾਰ ਉਹਨੂੰ ਤੂੰ ਲੈ ਜਾ ਉਹਨੇ ਉਹ ਇਹ ਕਾਹਗਾ ਦਿਨ ਲੀਂਦਾ ਕੇ ਮਾਰਦੇ ਮੇਰਾ ਭਾਈ ਮਾਰਿਆ ਬੰਦੇ ਗੁੱਡੇ ਮਾਰਦੇ ਉਹ ਕਹਦਾ ਮੈਂ ਮਾਰ ਕੇ ਵੇ ਬਹਾਦਰ ਕਹਾਉਂਗਾ ਜਿਹੜੀ ਆਦਮੀ ਫੇਰ ਵੀ ਉਹ ਗੱਲ ਸੋਚਦਾ ਹੈ ਤਾਂ ਟੋਗਰ ਲੱਗਿਆ ਸੋਚਦਾ ਵੀ ਇਹ ਸਾ ਇਹ ਬੇਕਰ ਲੱਗਿਆ ਤੰਕ ਲਾਉਣ ਕਾਬੀ ਕਰਾਉਣੀ ਮੈਂ ਉਹਨਾਂ ਨੂੰ ਕੁਛ ਮਸਾਲੇ ਹੋਰ ਵੀ ਦਿੱਤੇ ਜਾ ਸਕਦੇ ਨੇ ਆਦਿ ਫੇਰ ਵੀ ਸੋਚਦਾ ਹੈ ਜਾਨ ਨੂੰ ਬਾਕੀ ਅਜਾੜ ਹੈ ਪਰ ਉਹੋ ਜੇ ਬਸੇ ਹੋਰੇ ਤਾਂ ਵੀ ਹੈ ਉਹਦੀ ਕਦਰ ਵੀ ਫਿਰ ਕੀ ਹੁੰਦੀ ਹੈ ਸਰਬਾਤ ਜਗਦਾਰ ਦਾ ਫਿਰ ਉਹ ਤੇ ਜਦ ਬਰੇ ਬਰੇ ਬਰੇ ਹੋ ਘਰ ਦਾ ਭਿੰਦੀ ਟਾਹ ਲੰਕਾ ਹੋਰ ਕੀ ਦਿੰਦਾ ਸਮਝਾਇਆ ਹੈ ਰਹਾਜੀ ਲੈਂਦੇ ਤਾਂ ਮਤਲਬ ਫਕਤੋ ਠੀਕ ਹੈ ਹਾਂ ਤਾਂ ਤੋਂ ਠੀਕ ਹੈ ਵਰਤਾਂ ਨਾ ਤਾਂ ਰਾਜਬਬੀ ਗਣਨ ਹੋ ਜਾ ਕੇ ਬਸ ਜਵੇ ਹਰ ਦੇਸ਼ਾਵੇਂ ਸੁਤਰ ਵਜੂ ਇਹਦਾ ਰੂਪ ਜਿਹੜਾ ਕ੍ਰੂਪ ਰੂਪ ਹੈ ਉਹ ਮਿਟ ਜਾਂਦਾ ਜੇ ਮਾਇਆ ਦੇ ਰੂਪ ਨੂੰ ਆਪਣਾ ਰੂਪ ਸੁਧਾਈ ਦਾ ਜੇ ਮਾਇਆ ਦੇ ਸਰੀਰ ਦੇ ਰੂਪ ਨੂੰ ਆਪਣਾ ਨਾਮ ਦੇ ਮਜੀਠੇ ਰੰਗ ਚ ਰੰਗ ਦੀ ਫਿਰ ਇਹ ਮਨ ਸੁੰਦਰ ਰੰਗ ਉੱਥੇ ਹੀ ਉਹਦੇ ਜਿੱਤੇ ਬੱਟੀ ਪਈ ਹੈ ਮਜੀਠਾ ਨਹੀਂ ਇਹ ਲੱਗੂਗੀ ਸੁੰਦਰ ਆਪਣਾ ਇਹ ਸੁੰਦਰ ਪਹਿਲਾਂ ਹੀ ਹੈ ਨਾਮ ਮਜੀਠੇ ਰੰਗ ਦੀ ਉੱਗ ਗਿਆ ਫੇਰ ਕਿਵੇਂ ਕੋਈ ਆਦਮੀ ਬਲਦੇ ਦੇ ਵਿੱਚ ਉਹ ਬਖੋਟੇ ਆਦਮੀ ਦਾ ਬਜਣਾਣਾ ਦਾ ਠੀਕ ਹੈ ਹਨੂਵਾਲ ਦਾ ਬਖੋਟਾ ਲਾ ਦਿੱ ਗਏ ਕਿ ਚੱਕਾ ਲਗੂ ਕੋ ਘੜਾ ਲਗੂ ਇਹਨੇ ਬਖੋਟਾ ਲਾਇਆ ਨੂੰ ਆਪਣਾ ਆਪਾ ਲਾ ਗਏ ਖੌਟਾ ਉਤਾਰਦੇ ਤੂੰ ਅਜਿਹਾ ਖੌਟਾ ਹੀ ਧਾਰਨਾ ਹੈ ਉਹ ਮੇਰਾ ਖੌਟਾ ਲਾਇਆ ਖੌਟਾ ਉਤਾਰਦਾ ਫਿਰ ਇਹਦਾ ਆਪਣਾ ਰੂਪ ਤਾਂ ਠੀਕ ਹੈ ਆਪਣਾ ਰੂਪ ਤਾਂ ਅਛਾ ਰੂਪ ਹੈ ਇਹ ਜਿਹੜਾ ਬਾਲ ਨਾਲ ਖੌਟਾ ਹੈ ਇਹ ਤਾਂ ਫਿਰ ਆਪਣਾ ਮੰਨਣ ਲੱਗ ਪਿਆ ਬਸ ਬਸ ਉਹ ਮੰਨਣਾ ਰੂਪੋਂ ਰੂਪੋਂ ਪੈਣਾ ਹੈ ਇੱਕ ਥਾਂ ਹੋਰ ਆਇਆ ਗੁਰਬਾਣੀ ਤੇ ਇੱਥੇ ਸੰਤ ਜਿਹੜੇ ਹਿੰਦੂਵਾਦ ਹੈ ਉਹ ਹਜੇ ਆਪਣੀ ਪ੍ਰਵਚਨ ਨਾਲ ਜੀ ਗੱਲ ਕਰਦੇ ਉਹ ਕਹਿੰਦਾ ਸੁੰਦਰ ਵਹ ਹੈ ਸੁੰਦਰ ਉਹ ਹੈ ਜਿਹੜਾ ਸੁੰਦਰ ਕੰਮ ਕਰਦਾ ਜਿਹਦੇ ਕੰਮ ਸੁੰਦਰ ਨੇ ਸੁੰਦਰ ਕਰੇ ਵਧੀਆ ਆਦਮੀ ਉਹ ਹੈ ਪੰਜਾਬੀ ਹਲੇ ਵੀ ਠੀਕ ਹੈ ਬਾਣੀ ਨੇ ਕੋਲ ਬਗਦੀ ਤੇ ਸਹੀ ਸੁੰਦਰ ਸੋਹਣੇ ਸਾਥ ਸੰਗ ਜੇ ਕਰਦਾ ਹਿਰਦੇ ਹਿਰਦੇ ਦੀ ਗੱਲ ਕਰਤੀ ਨਾ ਉਹ ਤੇ ਸਾਥ ਜੇ ਬਹਿਣੇ ਪਰ ਜਿੱਥੇ ਬੈਠੇ ਉੱਥੇ ਜਾ ਕੇ ਬੈਠੂ ਤਾਂ ਨਹੀਂ ਸੁੱਤਰ ਜਿਹੜੀ ਦਰਬੰਦੀ ਦੀ ਗੱਲ ਹੈ ਸਟੀਕ ਹੈ ਇਹ ਗੱਲ ਨਹੀਂ ਰੇਚ ਸੁਧਰ ਕੰਮ ਕਰਦਾ ਉਹ ਸੁਧਰ ਸੁਧਰ ਕੰਮ ਕਿੱਥੇ ਬੈਠ ਕੇ ਕਰੂ ਕਦ ਕਰਦਾ ਸੁਧਰਗਾੜਾ ਸੁਧਰਗਾੜਾ ਕਦ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਕਰਦਾ ਸੁਧਰਗਾੜੀ ਜਿਹੜੇ ਪੁਰ ਪਾਪ ਨੇ ਆਪਣੇ ਬਣਾਏ ਇਹ ਵੀ ਸੁਧਰਗਾੜੀ ਬਣਾਏ ਤੇ ਆਪਣੇ ਆਪਣੇ ਉਹ ਸਲਾਈ ਬਣਦੇ ਨੇ ਇਹ ਇਹ ਨੂੰ ਸੁਧਰ ਗੱਪ ਇਹ ਨੂੰ ਸਾਡੀ ਅੱਗੇ ਚੱਲਦਾ ਹੁੰਦਾ ਜਿਹੜਾ ਮੈਨੂੰ ਜੱਗ ਲੱਗਦਾ ਜੋ ਤਾਂ ਹੈ ਵੀ ਜਨੋ ਸੰਸਾਰ ਵਿੱਚ ਚੁੱਕਾ ਰਹੇ ਨੇ ਇਹਨੂੰ ਹੂੰ ਆਮ ਤੌਰ ਤੇ ਕੋਲ ਮਸੀਹ ਸੁਪਨਾ ਆਪ ਦਾ ਸਟੈਂਡਰਡ ਹੈ ਅੱਜ ਅੰਡਾਲ ਕਰਤ ਸਾਖਤ ਗਾ ਰਹਾ ਸਰਾਡ ਕਰਦਾ ਹੁਣ ਸਾਖਤ ਜਿੰਨਾ ਚਿਰ ਕੋਰੇ ਉਹਨਾਂ ਜਗਾਂ साकत गावारा पशु पशु ज्ञान पशु पशु तो मात्र पशु तो है वो महज शरीर को ही आपा समझता है ता पशु शरीर पशु है जगत पशु है ਜਾਦ ਤਾ ਉਸ ਤਕਾਲ ਕਸਾਈ ਜਿਹੜੀ ਤੇ ਲਖੋ ਤਾ ਬੁੱਤਾਈ ਰੜੀ ਬੁੱਧ ਕਾਲ ਅੰਬੁੱਧ ਵਿਕਾਰਾ ਤਾ ਬੁੱਧ ਬਕਾਰ ਵਿਕਾਰ ਜੇ ਹੀ ਹੈ ਅੰਬੁੱਤ ਅੰਬੁੱਧ ਵਿਕਾਰਾ ਜਿਹਦੇ ਹਰ ਦੇ ਵਿੱਚ ਆਉਂਦਾ ਹੈ ਇਹ ਤੋਂ ਕਿ ਬਕਾਰੀ ਬੁੱਧਾਈ ਨਹੀਂ ਵਕਾਰ ਪੈਦਾ ਹੁੰਦੇ ਨੇ ਆ ਬੁੱਧ ਵਕਾਰਾਂ ਦਾ ਮਤਲਬ ਹੈ ਵਕਾਰ ਪੈਦਾ ਹੀ ਉਹ ਤਾਂ ਹੁੰਦੇ ਤੇ ਨਾਮ ਦਾ ਬਰੋਚ ਕਾਉਣਾ ਹੋਵੇ ਉਹ ਇਹ ਚੋਂ ਨੇ ਤਾਂ ਉਜੋਗੀ ਨਿਕਲਣੇ ਉੱਪਰ ਡਕਣ ਦੇ ਉਹ ਬੁੱਧ ਵਿਚੋਂ ਡਕਣ ਦੇ ਵਿਵੇਕ ਬੁੱਧੀ ਵਿਚੋਂ ਡਕਣ ਦੇ 2 ਲੱਖ ਲੱਖ ਸੋਪੋਰ 2 ਲੱਖ ਲੱਖ ਥੈਲੀਆਂ ਦੇ ਆਹ ਬੁੱਧੜੀ ਥੈਲੀ ਚੋਂ ਉੱਪਰ ਡਕਣ ਦੇ ਜਿਹੜੀ ਬੁੱਧੀ ਕੱਢ ਲੋ ਬਾਦੂ ਜਿੱਦਾਂ ਸਬੂਧ ਸਾਗਰ ਈਰ ਭਰਿਆ ਤੇ ਇਹ ਤੇ ਉਹ ਗੁਰੂ ਆਉਗੜੇ ਹਾਂ ਉਹ ਤੋਂ ਯਾਉਗੜੇ ਜੇ ਇਹਦਾ ਮੂੰਹ ਬੰਦ ਤਾਂ ਉਦੋਂ ਬੰਦ ਕਰਤਾ ਤਾਂ ਉਦੋਂ ਕਾਲੀਗਾ ਦੀ ਬੰਦ ਤੁਹਾਡਾ ਇਸ ਜਾਨੇ ਜੀ ਕੁਛ ਨਹੀਂ ਹਾਂ ਪੂਰਾ ਦੂਈ ਖੋਲੀ ਉਦੋਂ ਬੋਲ ਲੈ ਉਗਣ ਬਾਹਰ ਕੱਟੇ ਹੋਏ ਨੇ ਉਹ ਵੀ ਪਾਗਰੇ ਦੇ ਵਿੱਚ ਅੰਗੀਚ ਕੇ ਉਹ ਬੰਦ ਤਾਂ ਇਹ ਇੱਥੇ ਹੀ ਤੇ ਜੇ ਆਪਾਂ ਕੱਢਾਂਗੇ ਤਾਂ ਹੀ ਟਿਕਣਗੇ ਜਿੱਦਾਂ ਜਰ ਆਪਾਂ ਬੁੱਧੂਦਾਰ ਸਰਦੇ ਵਿੱਚ ਚੌਥਰ ਹੈ ਗੱਲ ਬਣੀ ਜਾਂਦੀ ਹੈ ਆਪ ਹੈ ਚਾਹਤਾ ਰ ਉਹ ਨਾ ਜਰ ਰੋਗੜ ਜੋ ਚੀਜ਼ ਥੱਲੇ ਖੁੱਲੀ ਹੈ ਕਿ ਬੇਸਣ ਵਾਲੀ ਬੋਰੀ ਖੁੱਲੀ ਹੈ ਬੇਸਣੇ ਨੂੰ ਬੇਸਣੇ ਨੇ ਕਹਿਣਾ ਰਹੀ ਹੋਈ ਹੈ ਆਲੀ ਖੁੱਲੀ ਹੋਈ ਹੈ ਜੀ ਪਰ ਇੱਥੇ ਕੋਈ ਰਹਦੀ ਹੈ ਬਸ ਕੋਈ ਹੋਰ ਦੋਰੀ ਨਹੀਂ ਹੈ ਕਿ ਹਮਦਪਤ ਵਾਲੀ ਭੋਰੀ ਹੈ ਪੁੱਲੀ ਪਰ ਮੈਂ ਹਮਦੂ ਨਾਮ ਹੈ ਨਾ ਫਿਰ ਨਿਕਲਦਾ ਹੈ ਜਿਹੜੇ ਨੇ ਦੋਈ ਖੁੱਲੀ ਇੱਥੇ ਜਾ ਕੇ ਦੱਸ ਬੋਲੋ ਆਇਆ ਜੇ ਉੱਤੇ ਹਾਂ ਤਾਂ ਸਹੀ ਜਾਂਦਾ ਬਸ ਜੇ ਥੱਲੇ ਆ ਉਹ ਤੇ ਚੱਲ ਮੈਂ ਕੋਈ ਹੁੱਲੂ ਵੀ ਕੋਤ ਜਗਾਇਨੀ ਜੇ ਰਾਂਵਾਲੀ ਕਰਨ ਗਈ ਫਿਰ ਉਧੇ ਚੋ ਚੋ ਮਰੀ ਜਕੜੀ ਜਾ ਫਿਰ ਮੱਤ ਵਿੱਚ ਜਿਆਦਾ ਤਨ ਜੋ ਹਾਲ ਬੜਾ एते जो की निकले जो पत्थर होकर औरियर एते जो ये निकल लो वो क्रोध चूड सब कुछ ऐसे है साक्षात बक्ता से खूबसूरत इस खूबसूरत पैलाद है, है।, है संसार सच्चारते है, सब कुछ है अरे सम्मान तो सारा ही है ये दा उतर साखदा दा एथे राहे ने दा हमेशा कूड़ भरे उधार मिला प्रधान की कूड़ दे दी जूट दे ताव मुद्दा दा राज चलता है ताव मुद्दा जे राज चलता है असल चा हुद्दो ते राज चलाणो चाहुंदी सी ਹਿੱਤਾ ਲਿਆਈ ਇੱਥੇ ਚਲਾ ਲੋ ਦਾ ਮੰਨੇ ਹੋਇਆ ਖਲ ਜੁਗ ਤਾਂ ਆਈ ਹੈ ਅਬਾ ਸਾਹੀ ਗੱਲ ਇਹ ਤਾਂ ਮੰਨੇ ਹੋਇਆ ਹੈ ਤੁਸੀਂ ਦੇਖੋ ਲੜੋ ਮਾਰੋ ਕੁਝ ਕਰੋ ਬਣਾਓ ਸੌਦਾ ਤੁਹਾਨੂੰ ਬਾਤ ਦਾ ਸਾਥ ਬੈ ਕੇ ਆਰਾਮ ਨਾਲ ਖਾ ਲੋ ਤੁਹਾਡੇ ਜੁਗਾ ਜੇ ਹੁਣ ਤੁਸੀਂ ਬਾਕੀ ਤੁਹਾਡੀ ਅਗਲ ਆਪਣੀ ਇਦੋਂ ਤੁਸੀਂ ਵਰਤ ਦੇ ਕੇ ਵੀ ਵੱਢ ਕੇ ਛੱਕਦੇ ਆਂ ਯਾਰ 15 ਬੰਗੂ ਪੇਲੀ ਸੜਨ ਬੰਗੂ ਦਾ ਖਾਣਾ ਖਾਣ ਦੇਣ ਉਹ ਗੱਲ ਕਰਦੇ ਹੋ ਯਾਰ ਤੁਹਾਡੀ ਅਕਲ ਤੇ ਤੁਸੀਂ ਇਹਨੂੰ ਵਰਤ ਦੇ ਅਸੀਂ ਤਾਂ ਬਾਤ ਆਈ ਬਾਕੀ ਤੁਹਾਡੀ ਤੁਸੀਂ ਕਹਿੰਦੇ ਉਸੇ ਸਿਆਣੇ ਜੀ ਤੁਹਾਨੂੰ ਅਸੀਂ ਕੁਝ ਨਹੀਂ ਆਇਆ ਥੋੜੇ ਸਿਆਣਪ ਦਾ ਫੇਰ ਪਤਾ ਲੱਗ ਸਿਆਣੇ ਰਹੋਗੇ ਸੁਖੀ ਰਹੋਗੇ ਸਿਆਣਪ ਨਾਲ ਵਰਤੋਗੇ ਸੁਖੀ ਰਹੋਗੇ ਨਹੀਂ ਸਿਆਣਪ ਨਾਲ ਵਰਤੋਗੇ ਦੁਖੀ ਹੋਗੇ ਅਸਾਂ ਨੂੰ ਤਾਂ ਤੁਸੀਂ ਦੱਸੋ ਕਰੋ ਲੋ ਭਾਈ ਅਹੀਂ ਤਾਂ ਥੋੜੀ ਸੋਢੀ ਐ ਤਾਂ ਸਾਨੂੰ ਤੂੰ ਕੁਝ ਕੱਢ ਲੈ ਸਾਡੀ ਬੰਦਣੀ ਐ ਥੋੜੀ ਤਾਂ ਅਸੀਂ ਕੀ ਸੋਢੀ ਤੁਸੀਂ ਸਾਨੂੰ ਕੀ ਰਾਏ ਦੇਣੀ ਹੈ ਤੁਸੀਂ ਕਰੋ ਮੈਨੂੰ ਰਾਏ ਦੇ ਜਾਓ ਇੱਥੇ ਆਪਣਾ ਹਰਦ ਕਰ ਪਰ ਇਹ ਉਹੀ ਕਰੀ ਜਾਂਦੇ ਨੇ ਇਹ ਫਿਰ ਕੀ ਔਰ ਬੂਹ ਮੈਂ ਤਾਂ ਬਲਾਉਂ ਮੈਂ ਤਾਂ ਬਲਾ ਕਰੇ ਕੋਈ ਤਾਂ ਬਲਾ ਕਰੇ ਕੋਈ ਤਾਂ ਆਹੋ ਚੱਲਦਾ ਆਹੋ ਬੁੱਧਦਾਰਾ ਤਾਹੀ ਕੀ ਰਾਜ ਕਰਦਾ ਵੇਰਾ ਹੁ ਚੱਲੇ ਉਹ ਕੰਨ ਦਾ ਵੇਰਾ ਆ ਜਾਂਦਾ ਦੋ ਆਦਮੀ ਜੀ ਆ ਜਾਂਦਾ ਫਿਰ ਇੱਕ ਕਾਜ਼ਮੀ ਜਾ ਜਾਂਦਾ ਅਖੀਰ ਤੇ ਕਾਜ਼ੂ ਤੋਂ ਬਦਾਂ ਲੱਗਦਾ ਵੇਰਾ ਰੌਲਾ ਕਿ ਜੇ ਇਕੱਲੇ ਜਾ ਜਾਂਦੇ ਪਤਾ ਲੱਗਦਾ ਕਸੂਰ ਕੀ ਦਾ ਕਸੂਰ ਕਿਉਂ ਹੈ ਜਦ ਇਕੱਲੇ ਦੇ ਵਿੱਚ ਡਿਸਕਸ ਕਰਦੇ ਹਰ ਪਾਸੇ ਉਹ ਉਹ ਹੀ ਤਾਂ ਮਰਿਆ ਜਿਹੜਾ ਖਰਾਬੀ ਕਰਦਾ ਸਾਰੀ ਜੋ ਕੁਝ ਕੀਤਾ ਜ਼ਬਰਕੀਆ ਬੋਲਦਾ ਬੋਲਦਾ ਇਹਨੂੰ ਚੁੱਪ ਕਰਾਓ ਮਰ ਜੇ ਮਨ ਚੋ ਪਹੁੰਚਿਆ ਸਾਰਾ ਸਾਰ ਸ਼ਾਂਤ ਤਾਂ ਛੜਾ ਛੜਾ ਦੁਨੀਆ ਦਾ ਝਗੜਾ ਕਦੇ ਨਹੀਂ ਖਤ ਹੋ ਜਾਂਦਾ ਬਾਹਰ ਦੇ ਬਾਹਰ ਕੋਪਰ ਚੈਨਾ ਕਰਕੇ ਜਿਹਨੂੰ ਮਰਜੀ ਝਗੜੇ ਲੱ ਕਰੇ ਜੋ ਕਦੇ ਨਹੀਂ ਕੱਲੇ ਬੋਧਾ ਦਾ ਇਲਾਜ ਕਰ ਲੋ ਭਾਈ ਆਪਣੇ ਆਪਣੇ ਬੋਧਾ ਦਾ ਇਲਾਜ ਕਰੋ ਗੁਰਬਾਣੀ ਬੋਧਾ ਦਾ ਇਲਾਜ ਕਰਦੀ ਹੈ ਸਿਰਣਾ ਮਟਾਉਣ ਵਾਸਤੇ ਰਾਣਾ ਰਾਖੂ ਲੈ ਬਟਾ ਸੋ ਸਭ ਸਭੋ ਚੜ੍ਹੇ ਕਰਾਉਂਗੀ ਕਰਾਏ 사ਦੂ ਵਾਲਾ ਸਵਾਲ ਲੈ ਲੋ ਕੋਈ ਜਿੱਦੇ ਤੁਸੀਂ ਵਰਵਖੋ 사ਦੂ ਉਹਦੇ ਹੀ 사ਦੂ 사ਦੂ ਬਤਾਉ ਮੇਰੇ 사ਦੂ ਰੱਬੋ ਜੀ ਉਹਨਾਂ ਦਾ ਝਗੜਾ ਕਿਉਂ ਜੇ ਤੁਹਾਡਾ ਜ਼ੋਰ ਹੈ ਸਾਧੂ ਦਾ ਝਗੜਾ ਹੈ ਸਾਧੂ ਉਹ ਨਹੀਂ ਨੇ ਚਿੱਤ ਸਾਰੇ ਉਹ ਨਹੀਂ ਨੇ ਚਿੱਤ ਵੀ ਉਹਨਾਂ ਦਾ ਝਗੜਾ ਕਿਉਂ ਨਹੀਂ ਤੁਹਾਡਾ ਜ਼ੋਰ ਝਗੜਾ ਬੜਦਾ ਆ ਕੇ ਜਾਂ ਸਾਧੂ ਉਹਦੀ ਪ੍ਰਧਾਨਗੀ ਹੋ ਜਾਂਦੀ ਹੈ ਨਾ ਪਰਾਂ ਦੇ ਵਿੱਚ ਝਗੜਾ ਸੱਚ ਤੇ ਜਿਆਦਾ ਜਾਂਦੇ ਨੇ ਨਾ ਸਾਰੇ ਜਦੇ ਝਗੜਾ ਬੜਦਾ ਜਦੋਂ ਯਾਰ ਸੱਚ ਤੇ ਇਨਸਾਫ ਤੇ ਹੱਕ ਤੇ ਇਨਸਾਫ ਤੇ ਸੱਚ ਹੱਕ ਸੱਚ ਤੇ ਨਹੀਂ ਹੁੰਦੇ ਉਸਮਾਨ ਕੀ ਕਹਿੰਦਾ ਹੱਕ ਤੇ ਸੱਚ ਹੱਕ ਸੱਚ ਉਹ ਕਰਦੇ ਵਾਕਿਆ ਹੀ ਹੱਕ ਹੱਕ ਤਾਂ ਅਗਲਾ ਗਲਤ ਵੀ ਜਿਤਾਉਣ ਲੱਗ ਜਾਂਦਾ ਮੇਰਾ ਹੱਕ ਦੇ ਨਾਲ ਸੱਚ ਲਾਦਾ ਹੱਕ ਦੇ ਨਾਲ ਸੱਚ ਲਾਇਆ ਜਿਹੜੇ ਵਾਕਿਆ ਹੀ ਉਹਦਾ ਹੱਕ ਹੈ ਸੱਚੀ ਮੂਜੀ ਉਹਦਾ ਹੱਕ ਹੈ ਜਦ ਹੱਕ ਕਰ ਸੱਚ ਤੇ ਖੜਗੇ ਝਗੜਾ ਬੜੇ ਤੂਏ ਦੇ ਹੱਕ ਤੇ ਜਿਆਦਾ ਭਾਗ ਨਿਗਾਰ ਰੱਖਾਂਗੇ ਝਗੜਾ ਤਾਂ ਹੀ ਹੋਊਗਾ ਜੇ ਆ ਦੂਆ ਆਪਣੇ ਹੱਕ ਤੇ ਜਿਗਰ ਰੱਖੂਗਾ ਸਾਰੇ ਸੰਤੋਖ ਤੇ ਆ ਗਏ ਅਸਲ ਦੇ ਵਿੱਚ ਕੁਰਬਾਨੀ ਝਗੜਾਈ ਬਟਾਉਂਦੀ ਹੈ ਅੱਜ ਦੇ ਝਗੜਾ ਕਿਉਂ ਇਸ ਸੰਤੋਖ ਹੈ ਨਹੀਂ ਜਦੋਂ ਦੋਖ ਦੀ ਪੜਾਈ ਹੈ ਕਰਬਾਨ ਪਾਉਣ ਦੀ ਪੜਾਈ ਹੈ ਸੰਤੋਖ ਦੀ ਪੜਾਈ ਦੀ ਹੈ ਕਰਬਾਨ ਪਾਉਣਾ ਪੜਾਈ ਦੀ ਹੈ ਅਬਰ ਦੇਖਣਾ ਪੜਾਈ ਦੀ ਹੈ ਪੜਾਈ ਆ ਸੰਤੋਖ ਧਾਰਨ ਕਰਨਾ ਜਿੱਥੇ ਸੰਤੋਖ ਨਾ ਹੋਣੀ ਹੈ ਕਰਬਾਨਾ ਪਾ ਕੇ ਨਹੀਂ ਹੋਣੀ ਹਾਂ ਜਦੋਂ ਬੰਦੀ ਨਾਲ ਨਹੀਂ ਹੋਣੀ ਜਦੋਂ ਬੰਦੀ ਬਾੜੇ ਹੁੰਦੀ ਸੰਤੋਖ ਨਾਲ ਕਿਰਪਾਨਾ ਪਹਿਲਾਂ ਦੀ ਆਮਰੀ ਜੈਮਲ ਪਾਸ਼ਾ ਵੇਲੇ ਕਿਹੜਾ ਖਰਪਾਨਾ ਦੀ ਰਾਇ ਸੀ ਜਦੈਬੰਦੀ ਤੋਂ ਉਦੋਂ ਵੀ ਸੀ ਉਦੋਂ ਨਹੀਂ ਸੀ ਪਹਿਲਾਂ ਵੀ ਸੀ ਜਦੈਬੰਦੀ ਦਾ ਮਤਲਬ ਸਿਰਫ ਵਿਚਾਰ ਧਾਰਾ ਇੱਕ ਸਭ ਵਿਚਾਰ ਕਰਦੀ ਹੈ ਜਦੈਬੰਦ ਜਦੈਬੰਦ ਦੇਖਦਾ ਹੀ ਹੈ ਦੇਖਦਾ ਵਿਚਾਰ ਧਾਰਾ ਨਹੀਂ ਹੈ ਸਲਵਾਰ ਦੇ ਧਰ ਬੇਕ ਕਿਉਂ ਹੁਣ ਦੇ ਕਰਦੇ ਨੇ ਰੁਕਣ ਵੀ ਲੜਦੇ ਕੁਰਤਾ ਤਾਂ ਅਟਕੇ ਲੜਦੇ ਛਾੜੇ ਰਹੋ ਵੀ ਆਪਸ ਵਿੱਚ ਹੀ ਲੜਾਂਗੇ ਦੋਈ ਬਹਿ ਜਾਣਗੇ ਕੋਈ ਜਾਂਦੀ ਬਹੁਤ ਕੀਤੀ ਰੋਜ਼ ਰੋਜ਼ ਰੋਜ਼ ਬਰਾਦਰ ਨੂੰ ਯਾਦ ਕੀਤਾ ਸੀ ਸਮਝਦੇ ਰਹੇ ਉਸ ਕੱਲ ਨੂੰ ਇਸਤੀ ਪੜਦੇ ਜੀ ਸਰਬ ਦੇ ਫੈਲਰਾ ਇਸਲਾਮ ਦਾ ਹੀ ਰਾਜ ਹੈ ਇੱਥੇ ਪਠਾਨਾਂ ਦਾ ਮੁਗਲ ਬਿਖਰवाने ਨੇ ਮੁਗਲ ਪਠਾਨਾਂ ਭਾਈ ਲੜਾਈ ਆ ਮੁਗਲ ਪਠਾਨਾਂ ਭਾਈ ਲੜਾਈ ਕੀ ਕਿਸੇ ਧੱਕ ਦੇ ਨਾਲ ਲੜਾਈ ਖਤਮ ਹੋ ਜਾਂਦੀ ਹੈ ਬਿਲਕੁਲ ਨਹੀਂ ਧਰਗੁਣਾ ਲੜਾਈ ਹੁੰਦੀ ਹੈ ਜਰੂਰ ਪਰ ਜੇ ਤਰੁ ਸੱਚ ਤਰੁ ਹੋਵੇ ਸੱਚ ਤਰੁ ਉਹਦਾ ਜਿਹੜਾ ਮਾਇਆ ਦਾ ਪਰ ਉਠਿਆ ਸੰਸਾਰੀ ਰਾਜ ਭਗਤੀ ਭੁਖੇ ਰਹੋ ਮਾਇਆ ਦੀ ਸੱਚੇ ਰੋਗ ਦੇ ਬਿਨਾਂ ਕੋਈ ਭੁਖੇ ਰਹੋ ਉਹਦਾ ਹੀ ਤਰੁ ਹੁੰਦਾ ਫੇਰ ਲੜਾਈ ਹੋਣੀ ਕਾਦੀ ਆ ਲੜਾਈ ਕਾਦੀ ਨਹੀਂ ਲੜਾਈ ਲੜਾਈ ਦਾ ਕਾਰਨ ਦਿੱਲੀ ਦਾ ਰਾਜਕੋਲ ਹੈ ਹੋਲਾ ਆ ਗਿਆ ਉਹ ਕਹਿੰਦਾ ਵੀ ਤੂੰ ਕਰ ਦਿੱਲੀ ਦਾ ਰਾਜ ਉਹ ਕਹਿੰਦਾ ਤੂੰ ਕਰ ਬਗੈਰ ਤੋਂ ਫਤਹਿ ਕੀਤੀ ਸੀ ਉਹਦੀ ਕਮਾਨ ਚ ਬਗੈਰ ਤੋਂ ਕਹਿੰਦਾ ਵੀ ਗੱਲ ਸੁਣ ਲਓ ਮੈਂ ਤਾਂ ਜਾਊਂਗਾ ਹੋਲੇ ਮੈਂ ਤਾਂ ਇਹ ਹੋਲਾ ਛੱਡ ਲਉ ਰਾਜਬਾਈ ਜੀ ਨੇ ਨਾਲ ਲੱਗ ਪੁਛ ਵੀ ਭਾਈ ਇੱਦਾਂ ਦਿੱਲੀ ਬਥਾ ਵਧੇ ਹੋਈ ਆ ਛੱਡ ਕੇ ਨਹੀਂ ਜਾਣਾ ਚਾਹੀਦਾ ਇਹਦੀ ਕਰਨਾ ਚਾਹੀਦਾ ਬੋਲੀ ਕਰਨਾ ਚਾਹੀਦਾ ਵੇ ਕਿਹੜਾ ਰੋਜ ਫਤਿਹ ਕਾ ਦੀ ਸੌਖੀ ਗੱਲ ਐ ਚਲੋ ਉਹ ਵੀ ਆਪਣੇ ਆਪ ਸਾਰੇ ਸੀ ਉਹ ਜਿਹੜੇ ਦੂਏ ਦੇ ਕਹਿੰਦੇ ਚਲ ਦਿੱਲੀ ਦਾ ਰੋਜ ਹੋਣੀ ਜਾਣੀ ਗੱਲ ਕੋਈ ਦਿੱਲੀ ਦੇ ਰਾਜ ਨੂੰ ਨਹੀਂ ਬਜਿਆ ਸਾਰੇ ਛੱਡ ਕੇ ਆ ਗਏ ਛੁੱਡੀਓ ਦਿੱਲੀ ਡਾਲੇ ਭਰਟਿਆਂ ਤੋਂ ਕਬਜ਼ਾ ਕੀਤਾ ਸੀ ਇਹਨਾਂ ਨੇ ਵਿੱਚ ਭਰਟਿਆਂ ਨਾਲ ਲੱਗਦੀ ਰਹੀ ਹੈ ਇਹਨਾਂ ਦੀ ਪਰ ਪਤਾ ਨਹੀਂ ਲੱਗਿਆ ਭਰਟੇ ਕਿਵੇਂ ਵਿਆਹ ਗੁਰਮੁਖ ਨਾਲ ਮਿਟਾਈ ਰਾੜ ਵਰਮਕੀ ਆੜ ਬਟਾਈ ਗੁਰਮੁਖ ਨੇ ਝਗੜਾ ਬਟਾਇਆ ਨਮਕ ਗੁਰਮੁਖਾਂ ਦੇ ਹੀ ਝਗੜਾ ਬਟਾ ਰਾੜ ਬਟੀ ਸੰਸਾਰ ਨਾਲ ਹਮਰਾ ਝਗੜਾ ਰਹਾ ਦੋ ਪਟਤ ਦਾ ਵੀ ਇੱਕ ਧਰਮ ਦਾ ਵੀ ਕਾ ਇਹ ਜਿਹੜੇ ਨੇ ਨਾ ਸਾਥਾਂ ਝਗੜੇ ਕਰਵਾਉਂਦੀਆਂ ਨੇ ਜਿਹੜੀ ਮਤ ਝਗੜਾ ਕਰਵਾਉਂਦੀ ਐ ਮਤ ਸਤ ਦਾ ਦੀ ਆ ਜਿਹੜੀ ਸਿੱਖ ਪਤੀ ਝਗੜਾ ਕਰਵਾਉਂਦੀ ਐ ਗੁਰਮਤ ਰਹੀ ਹੋਦੀ ਸਤ ਦਾ ਦੀ ਆ ਜਮਾ ਬਹਿ ਗਿਆ ਸਤ ਨਮਕ ਦਾ ਰਹਿ ਗਿਆ ਸਿੱਖ ਆਲਾ ਸ਼ੀਸ਼ਾ ਬਣ ਗਿਆ ਸਤ ਦਾਲ ਫਰੇਬਾਲਾ ਸਿੱਖ ਸਿੱਖੀ ਆਲਾ ਸ਼ੀਸ਼ਾ ਅੰਦਰ ਸਜਦਾ ਸ਼ੀਸ਼ੇ ਰੇ ਉਲੋ ਜਹਰੰਦ ਦਾ ਸ਼ੀਸ਼ਾ ਹਰ ਹੀ ਦੇ ਗਣਾ ਤੇ ਇਹ ਲਾਲ ਸੀਚਾ ਦਾ ਹਾਲੇ ਦੇ ਵਿਚਾਰਤਾਰ ਆਦੀ ਹੈ ਵਿਚਾਰਤਾਰ ਹੈ ਦੂਰ ਅੱਛਾ ਤੇ ਵਿਚਾਰਤਾਰ ਤਰਤਾਸ਼ੀ ਵਾਲੀ ਉਹ ਤਾਂ ਹੋਈ ਕਿ 1042 ਲੋਵ ਲਾਲ ਚੜੀ ਤ੍ਰਿਤੀਆ ਸਿੱਧੀ ਵਾਲੀ ਕੋਈ ਵਿਚਾਰਤਾਰ ਸਾਕਤਾਂ ਦੀ ਗੱਤ ਹੈ ਸਾਡੇ ਕੋਲ ਸਾਕਤਾਂ ਦੀ। ਇਹ ਸਰਸਿਆਂ ਦੇ ਮਾਮਲੇ 'ਚ ਵੀ ਇਹੀ ਗਲਤ ਨੇ। ਕੀ ਚ? ਸਾਰੇ ਸਾਹ ਨਾਲ ਲੜਾਈ 'ਚ। ਇਹ ਠੀਕ ਇਥੇ ਨੇ। ਜਾਇ ਜੇ ਸਰਸਿਆੜਾ ਹੋ ਜਾਏ ਲੜਾਈ ਕਰੀਗੇ। ਹੈ ਲੜਾਈ ਕਰੀਗੇ। ਲੜਾਈ ਤਾਂ ਵੀ ਸੰਗਤਾਂ ਦੀ ਹੋਈ ਹੈ ਕਿ ਉਧਰ ਲੈ ਕੇ ਉਧਰ ਲੈ ਕੇ। ਸੰਗਤਾਂ ਮਤਲ ਹੋਲ ਆ ਕਿ ਸੰਗਤਾਂ ਦੀ ਲੜਾਈ ਹੈ। ਉੱਧਰ ਵੀ। ਰਾਜਦੇਵ ਨੂੰ ਲਾਇਆ ਕੰਫਰਾ ਦੇ। ਚੌਧਰ ਦੀ ਰਲਾਈ ਕੋ ਬਰਾ ਦੇ ਆਹ ਉਧਰ ਮੁਰੜਾਈ ਦਾ ਹੈ ਨਹੀਂ ਉਹਨਾਂ ਦਾ ਜੇ ਰੋਈ ਪਾਸੀ ਨਹੀਂ ਰੋਹ ਦੀ ਗੱਲ ਉਹਦੀ ਸਰਕਾਰਾਂ ਕੋਈ ਹੋਰ ਹਦਾ ਕਦਾ ਜਰਾ ਹੋ ਜੇ ਤਾਂ 120 ਲੱਖ ਹੈ ਗੱਡੀ 'ਚ ਬੈਠਿਆ ਗੋਲੀ ਚਲਾਉਂਦਾ ਮੇਰਾ ਬਲੋਕਰ बॉडीगार्ड। ਬਿਰੀ ਅਕੈਡਮੀ ਰੋਕ ਵਿੱਚ ਲੱਤੀ ਗੋਲੀ। ਇਕਦਮ ਜੇ ਤੇਰੀ ਅਗਾਂ ਤੋ ਫਿਰਲ ਚਲਾਈਏ ਤਾਂ ਵੀ ਤੇਰੀ ਜੂਗੂ ਵਰੀ। ਅਈ ਕਿੱਥੇ ਬੈਠਾ ਹੁੰਦਾ ਹੈ ਗਲਤੀ ਐ ਤੇ ਐਸਐਸਪੀ ਕਰਦਾ ਅਈ ਨੂੰ ਸਟੰਡ ਕਰਦਾ। ਕਿੱਥੇ ਬੈਠਾ ਹੁੰਦਾ ਉਹ ਬੈਂਚ ਬੈਠਾ ਗੱਡੀ ਦੇ। ਉਹ ਕਿੱਥੇ ਬੈਠਾ ਹੁੰਦਾ ਐਸਪੀ। ਥਾਣੇਦਾਰ ਗਲਤੀ ਕਰਦਾ ਇਸ ਨੂੰ ਟੱਕ ਦੇ ਦਰਵੇਲੇ ਮੜ ਕੇ। ਜੋ ਗੱਲ ਕਰਦਾ ਐ ਇਸ ਵੀਰ ਕਰਦਾ ਉਹ ਗੋਡੇ ਰੇਕੇ ਤੇ ਗੋੜੀ ਚਲਾਤੀ ਤੇਵੇ ਕਦੇ ਚਲਾਉਂਦਾ ਗੋੜੀ ਉਹ ਇਹ ਕਹੇ ਦੇ ਚਲਾਈਆ ਵਿੱਚ ਬੈਠਾ ਗੱਡੀ ਦੇ ਨਾਵੀਗ ਲਾਈਗੂ ਮੇ ਬਾਰੀ ਹੁੰਦੀ ਮਾਮਲੇ 'ਚ ਠੀਕ ਨੇ ਉਹ ਤਾਂ ਗਲਤ ਨੇ ਆਜੁੱਂ ਬੰਦ ਕਰ ਦੋ ਤੇ ਕੋਈ ਸਸੰਗ ਹੈ ਆਪਣਾ ਦੱਸੋ ਵਿਚਾਰ ਤਾਂ ਆਉਂਦੀ ਜਸੇ ਧੋੜੀ ਜਸੇ ਕੱਲੂ ਥੋੜਾ ਵੀ ਕਾਇਦਾ ਕੋਈ ਘਰ ਤੇ ਜਿਹੜੇ ਤੁਸੀਂ ਆਪਣਾ ਸਸੰਗ ਤੋਂ ਆਪਣਾ ਕਰੋ ਇਹ ਗੱਲ ਉਹ ਗੱਲ ਨੂੰ ਤੁਸੀਂ ਹਲਕੀ ਸਾਥ ਤੋਂ ਕਰਦੇ ਪਰ ਇਹਨੇ ਤੇ ਆਪਣੀ ਹਲਕੀ ਇਹਨਾਂ ਗੱਲੇ ਹੀ ਨਹੀਂ ਕੋਈ ਇਹਨਾਂ ਕੋਲ ਵੇ ਸਾਡੇ ਨਾਲ ਬੋਲੇ ਕੋਈ ਨਹੀਂ ਗੱਲ ਤਾਂ ਇਹ ਆ ਵੀ ਇਹ ਨਾਲ ਚਲੋ ਇਹਨਾਂ ਨੇ ਗੁਰੁੱਤੇ ਹੀ ਛੱਡ ਦਿੱਤੀ ਲੜਾਈ ਕਿਹੜੀ ਗੱਲ ਦੀ ਕਰਦੇ ਹੋ ਨਹੀਂ ਪੰਜਾਬ ਸਾਡਾ ਕੇਂਦਰ ਹੈ ਸਿੱਖੀ ਦਾ ਇੱਥੇ ਪੈਰਲ ਉਹ ਫਾਇਦਾ ਹੋਇਆ ਪਹਿਲੇ ਤੇ ਉਹ ਕੁਛ ਗੱਲ ਹੋ ਐ ਉੱਥੇ ਦੀ ਉੱਥੇ ਦੀ ਗੁੱਡੀ ਸਿਆਸਤ ਐ ਉਥੇ ਐਵੇਂ ਨਹੀਂ ਗੋਲੀ ਖੱਲੀ ਉੱਥੇ ਬੜੀ ਤਕੜੀ ਤਾਂ ਨਹੀਂ ਆਦਾ ਨੇ ਬਣਾਈ ਤੇ ਗੋਲਸਰਸ ਵਾਲੇ ਬੜੀ ਆਹੋ ਐਕੀ ਇਹ ਰੋੜਾ ਕਾਂਗਰਸ ਗਰਾਊਂਡ ਉੱਥੇ ਕੰਮ ਹੋਇਆ। ਨਾ ਕੋਥੇ ਉੜ ਕਾਂਗਰਸ ਰਾਜ। ਉੱਥੇ ਕਤਲ ਘਰਾਤਾ। ਉੱਥੇ ਫਿਰ ਦੁਬਾਰਾ ਵੱਡੇ ਆਏ ਨੂੰ। ਜਿਹੜੇ ਇਹੋ ਦਾ ਕਤਲ ਲੱਗੇ ਅਰਧਣੇ ਪਾੜਣਗੇ ਤੇ। ਸੀਪੀਆਈ ਹਲਦੈਂਟ ਆ ਗਿਆ। ਸੀਪੀਆਈ ਹਲਦੈਂਟ ਆ ਗਿਆ ਤੇ ਇਹਨੂੰ ਕੇਸ ਇਹਨੂੰ ਪੜਨਾ ਪੈਣਾ ਹੈ। ਉਹਦਾ ਕੇਸ ਪੜਨ ਪੈਣਾ ਹੈ। ਜਦ ਬਾਅਦ ਆਵਰ ਕਾਂਗਰਸੀ ਲੋੜੇ ਦੁਆਰੇ ਇਹਦਾ ਕੇਸ ਲੜਨਾ ਨਹੀਂ ਚੱਲਦਾ। ਕ੍ਰਮਾ ਹਰ ਸ਼ੁਰੂ ਕਰ ਲਿਆ ਉਹਨਾਂ ਨੇ ਪੰਜ ਚਾਰ ਸਾਲ ਉਹਦੇ ਨਾਲ ਟੰਗ ਰੱਖਣਗੇ ਇਹ ਤਾਂ ਨਵੇਂ ਤਨੂ ਚਲੋ ਖਤਮੇ ਹੋਣੇ ਹੈ ਪੂਰੀ ਚਾਹੇ ਜੇ ਕਿਸ ਪੈਣ ਰੱਖਿਆ ਜੋ ਟੱਕੀ ਵਾਲਾ ਹੋ ਗਿਆ ਹੌਲੀ ਵੀ ਹੋਵੇ 2-4 ਸਾਲ ਹੋਰ ਪੈਗੇ ਫਿਰ ਆ ਆ ਵੀ ਬੱਤ ਬਲਗ ਵੀ ਇਹ ਵੀ ਕਾਬਲ ਤਾਂ ਹੈ ਜੀ ਬਦਵਾ ਆਹ ਹੁਣ ਜਰੂਰ ਸੀ ਇਹਨੂੰ ਵੀ ਲੋਡ ਇਹਦਾ ਬਦਲ ਰ ਹੈ ਬਦਲ ਨਹੀਂ ਉਹ ਤੇ ਬਦਲ ਹਾਂ ਹਾਂ ਹਾਂ ਹਾਂ ਮੇਰੇ ਵੀ ਠੀਕ ਨਾ ਕੋਈ ਨ ਪੰਗਾ ਨਹੀਂ ਦੇ ਇਹਦਾ ਬਦਲ ਰ ਹੈ ਇਹ ਤਾਂ ਕਾਬਲੇ ਦੀ ਹੈ ਤੇ ਬੋਲਦਾ ਨਹੀਂ ਦੇਖ ਲੈ ਨੂੰ ਬੋਲਣਾ ਆਵੇ ਨਾ ਕੋ ਗੱਲ ਨਾ ਲੈਣਾ ਤੇ ਉਹਰੇ ਕੀਤਾ ਹੋਇਆ ਮੁੰਦੂਆ ਆ ਆ ਰਹੇ ਨੇ ਫੇਰ ਅਨ ਕਾਰੀ ਜੀ ਗੋ ਲੈ ਕਰ ਉੱਥੇ ਤਾਂ ਜਾ ਜੀ ਜੀ ਹਾਂ ਮੇਰੇ ਉਧਰ ਨੂਰ ਮਹਿੰਦੇ ਜਾ ਗੱਲ ਹੋ ਗਈ ਪੂਰਾ ਥੱਪ ਘਾਲੇ ਤਿੰਨ ਵਾਰੀ ਗਾਣੇ ਨੇ ਪਈਆਂ 70 ਰੁਪਏ ਦਾ ਕੀਤਾ ਉਹ ਜੱਰੀ ਇਹਦੇ ਜ਼ਿਆਦਾ ਬਗਲਾਉਂਦਾ ਉਹ ਉਹ ਜ਼ਿਆਦਾ ਜਾਂਦੇ ਰੂ ਇਹ ਸਭ ਇਹਦਾ ਸਿਆਸੀ ਗੱਲਾਂ ਨੇ ਠੀਕ ਹੈ ਜਿਹੜੇ ਲੋਕ ਧਰਮ ਨੂੰ ਸਿਆਸਤ ਦੀ ਪੌੜੀ ਬਣਾਉਂਦੇ ਨੇ ਉਹਨਾਂ ਵਾਸਤੇ ਪੈਦਾ ਹੋਣੀ ਚਾਹੀਦੀ ਸੀ ਉਹਨਾਂ ਨੂੰ ਪ੍ਰੋਬਲਮਸ ਪ੍ਰੋਬਲਮ ਆ ਜੇ ਇਹਦਾ ਨਾ ਕਰਾਂਗੇ ਸੁਣੋ ਆ ਤੂੰ ਇਹਦਾ ਧਾਰਮਿਕ ਹੈ ਨਹੀਂ ਤਕਾਲੀ ਤੂੰ ਦਾ ਧਰਮਕਾ ਦੂਆ ਪ੍ਰਚਾਰ ਕਰ ਤੂੰ ਧਰਮ ਦਾ ਸੀਗਾ ਤੇ ਕਈ ਇਹਨੂੰ ਧਰਮ ਦੇ ਦੀ ਇਹਨਾਂ ਦਾ ਧਰਮ ਛੱਡਦਾ ਤੇਰਾ ਤਾਂ ਫੜਿਆ ਆ ਤੂੰ ਦਾ ਧਰਮ ਤੇ ਦੋ ਪ੍ਰਜਾਤਨ ਜੀ ਆਗਲ ਤੇ ਜਾਂਰਦਤ ਜੀ ਦਲ ਤੇ ਤੇ ਤੁਛਰਤਾ ਤੇਰੀ ਜਾਨ ਬੁੱਝ ਕੇ ਸਰਦ ਅਨਾਲਾ ਗੁਰਮੁਖਰਾ ਨਾਲ ਗਰਭਵਕ ਹੋ ਜਾਂਦਾ ਹੈ। ਉਹ ਆ ਕੇ ਡਾ ਬੀਜ। ਝਗੜੇ ਨਾਲ ਇੱਕ ਗਰਭ ਗਰਭ ਵਿੱਚ ਪਿਆ। ਝਗੜੇ ਨਾਲ ਬੀਜ ਵਿੱਚ ਪਿਆ ਹੈ ਬੀਜ ਰੂਪ ਗਰਭ ਬੀਜ ਤੋਂ ਬਦਲ ਕੇ ਗਰਭ ਚਲਾ ਜਾਂਦਾ। ਬੀਜ ਵਿੱਚ ਜਿਹੜਾ ਜੀਵ ਉਹ ਗਰਭ ਦੇ ਵਿੱਚ ਹੀ ਹੈ। ਬੀਜ ਹੈ। ਉਦਾਵਣ ਕਿਰਤ ਤੁਹਾਰਾ ਹੈ। ਉਦਾਵਣ ਵਾਸਤੇ ਬੀਜ ਨੂੰ ਜਬੀ ਦਿੱਤੀ ਜਾਂਦੀ ਹੁੰਦੀ। ਖਰਾਕ ਵਾਸਤੇ ਵੀ ਦਿੱਤੀ ਜਾਂਦੀ। ਢਾਣੇ ਬਾਹਰ ਵੀ ਜਬੇ ਹੁੰਦੇ ਨੇ ਸਾਰੇ। ਉਦਾਵਣ ਨੂੰ ਵਾਸਤੇ ਨਹੀਂ ਦੇਣੀ। ਹਾਂ। ਫੋਟੇ ਨੂੰ ਜੋਦਾ ਰੱਖਣ ਵਾਸਤੇ ਬੜਬਾਲ ਵਾਸਤੇ ਵੀ ਬਾਹਰ ਵੀ ਜਬੇ ਹੁੰਦੇ ਨੇ ਪਾਣੀ ਚਾਹੀਦਾ। ਫੇਰ ਖਰਾਕੇ ਤੁਹੋ ਬੇ ਉਹਦਾ ਜਿੰਨੀ ਕਿਸੀ ਪੈਦਾ ਹੋ ਗਿਆ ਪੈਦਾ ਹੋਣ ਵਾਸਤੇ ਜ਼ਬੀਦੀ ਚਾਹੀਦੀ ਉਹਦੀ ਖਰਾਕਤ ਪਈ ਹੈ ਆਂਡੇ ਜੋ ਦੀ ਖਰਾਕ ਪਈ ਹੈ ਕੀ ਮਤਲਬ ਹੋਇਆ ਆਪਣਾ ਜੀਵ ਦੇ ਰਬੂ ਦੇ ਅੰਡੇ ਜਾਨਾ ਜਿਹੜਾ ਤੇ ਜੋ ਕੁਝ ਨੂੰ ਚਾਹੀਦਾ ਹੈ ਵਧੀਆ ਦੇਰ ਦੇਰ ਹੈ ਉਹਨੂੰ ਪਰਬਦੇ ਆਡੇ ਇਹ ਤੁਸੀਂ ਇਹ ਸਮਝ ਲੋ ਇੱਕ ਕਰ ਲੈ ਬਸ ਇੱਕ ਕਰ ਦੇ ਰਹੇ ਆ ਇੱਕ ਕਰ ਇਹ ਇੱਕ ਦਾ ਹੁਦਰਾ ਕੇ ਝਗੜਾ ਹੋਗਾ ਜੇ ਆਇ ਇੱਕ ਤਾਂ ਹੀ अजे तू सीधा उस झगड़े दी सेंस विच जो झगड़ा फटेला दे आपने दोनों भाई फट गए फट गए ना बनकुटा आवे उस गारा एकता होगी कोवे यहां जो तुझे चेक के को आ गया फिर प्रेम आ गया ਜੇ ਦੋਹਾਂ 'ਚ ਪ੍ਰੇਮ ਆ ਗਿਆ ਛਤਰਬੂਸਤ ਵਿੱਚ ਫਿਰ ਵਿੱਚੋਂ ਫੁੱਟ ਆ ਪੜਿਆ ਸ਼ਬਦ ਗੁਰੂ ਫੁੱਟਿਆ ਜੋ ਪੈਦਾ ਕਿਓ ਜੀ ਪ੍ਰੋਸ ਜਦੋਂ ਕਿਵੇਂ ਪ੍ਰੇਮ ਕੀਤਾ ਕਿਨੇ ਕੀਤਾ ਨੇ ਪ੍ਰੇਮ ਕੀਤਾ ਵਿੱਚੋਂ ਪੈਦਾ ਕਿਓ ਆਇਆ ਪਾਇਆ ਬਰਾਬਰ ਪ੍ਰੋਟੋਕੋਲ ਪਾਇਆ ਪਾਇਓ ਤੇ ਧੂਬਾਰੋ ਧੂਬਾਇਓ ਬਰਾਬਰ ਤੋ ਪਾਇਆ ਜੋ ਬੂਟਾ ਪੈਦਾ ਹੋਇਆ ਦੋਹਾਂ ਦੇ ਵਿਚਾਲੇ ਪੈਦਾ ਹੋਇਆ ਇਹਦੇ ਦੇ ਵਿਚੋ ਪੈਦਾ ਹੋਇਆ ਬਲ ਰੇਮ ਕਾਲੋ ਉਹਨੂੰ ਸੰਗ ਕਾਲੋ ਲਲ ਕੋਈ ਪ੍ਰੇਮ ਦੀ ਪੈਦਾ ਕਰਦਾ ਦੇੜਤਾ ਇੰਨਾ ਪੈਰਾ ਕਰਦਾ ਇੱਕ ਬਣਾ ਲੰਦਾ ਉਹਦੇ ਵਿੱਚ ਜਾ ਕੇ ਦੋਏ ਇੱਕੋ ਜਿਹੜਾ ਪਾਣੀ ਆ ਦੋਦੇ ਇੱਕ ਹੋਵੇ ਪਾੜੇ ਪਾਣੀ ਦੇ ਉੱਤੇ ਮਿੱਟੀ ਦਾ ਤੇਲ ਫਿਰਦੀ ਹੋਣੀ ਕੋਤ ਅਲੱਗ ਪਾਣੀ ਵਰਗ ਗਈ ਨਦੀ ਵਰਗ ਗਈ ਆ ਨਾ ਬਟ ਲੱਗਦੇ ਹੀ ਰਹਦਾ ਤਿਆਰ ਹੋਰ ਤੇ ਘਟੂ ਦੂਰੋਂ ਉੱਪਰ ਫਿਰਦਾ ਫਿਰ ਪਾਣੀ ਵਰਗਦਾ ਦੁੱਧਾ ਦੀ ਚੀਜ਼ ਲੱਗੂ ਜਦ ਸਰੋਂ ਦੇ ਤੇਲ ਦੀ ਮਿੱਟੀ ਦੇ ਲੁਪਲਾਵੋਗੇ ਫਿਰ ਮਿਲ ਜੂਗਾ ਸਰੋਂ ਦੇ ਤੇਲ ਜਾਪੜਾ ਪੜੀ ਜੀ ਮਿਲ ਜਾ ਬਿੱਟੀ ਦੇ ਤੇਲ ਨੂੰ ਤੇਲ ਦਾ ਸਰੋਂ ਦਾ ਤੇਲ ਨੂੰ ਮਿਕਸ ਹੋ ਜਾਂਦਾ ਹੋ ਜਾਂਦਾ ਹੈ ਉਹ ਤੇਲ ਪੂਰਾ ਸਵਾਦ ਇਹ ਨਾਲ ਹੀ ਇਹਨਾਂ ਮਿੱਟੀ ਹੈ ਤੇਲ ਪਿਆ ਨਾ ਆਵਾਜੀਲੀ ਹੈ ਕੋੜਾ ਬਿਠਾ ਠੀਬੇ ਬੱਟੀ ਜੀ ਹੈ ਹੈ ਠੀਬੇ ਆ ਜਿੱਦੇ ਰਸਲੇ ਫੜਲੇ ਸੱਪੋ ਜੈ ਸੱਪਟੀ ਦੇ ਬਿਤੀ ਟੱਕਾ ਬਿਠਾ ਕੋੜਾ ਅਸਲੀ ਬਿਟੀ ਦੇ ਵਿੱਚ ਦਾ ਉਹ ਮਾਤਰਾ ਜੀ ਨਹੀਂ ਹੈਗੇ ਬੀਜ ਵਿੱਚ ਕਰਾ ਬਣਾਉਂਦੇ ਉਸੇ ਰਸ ਕੌੜਾ ਕਰ ਦੇਣਾ ਉਹ ਜਿਹੜਾ ਬੀਜ ਵਿੱਚ ਜੀਵਾ ਉਹਦੀ ਕਰਾਮਾਤ ਬੀਜ ਉਹਨੇ ਲੈਣੀ ਆ ਉਹਨੇ ਲੈਣੀ ਤੇਰਾ ਜੀਵ ਦੀ ਵੀ ਕਰਾਮਾਤ ਅੱਡੇ ਜਿਹੜੀ ਆ ਉਸ ਟਾਈਮ ਦੇ ਉਹੀ ਸਰੀਰ ਹੈ ਬੀਜ ਜਿਹੜਾ ਬੀਜ ਜਿਹੜਾ ਬਣਾਇਆ ਉਹਦੇ ਚ ਕਰਾਮਾਤ ਆ ਕਿ ਉਹ ਜਿਹੜਾ ਰਸ ਪੈਦਾ ਕਰਦਾ ਉਹ ਸਰੀਰ ਕਰਾਸ ਹੈ ਉਹ ਆਤਮ ਕਰਾਸਰੀ ਹੈ ਜਿਹੜਾ ਸਰੀਰ ਕਰਾਸਵੇ ਸਰੀਰ ਨੂੰ ਚਾਹੀਦੇ ਉਹ ਕਰਾਵਾ ਬੀਜ ਵਿੱਚ ਹੀ ਆਤਮਦ ਰਸਾਇਣੀ ਜੋ ਆ ਬੀਜ ਬਣਾਇਆ ਅੱਡ ਉਹ ਲੈਣੀ ਉਹੀ ਉਹੀ ਲੈਣ ਉਹ ਧਰਤੀ ਆ ਪਾਣੀ ਦੋਹੀ ਲਿਆ ਮਿੱਟੀ ਹੋਈ ਆ ਮਿੱਟੀ ਹੋਈ ਆ ਖਾਦ ਹੋਈ ਆ ਆ ਕੱਟੇ ਦੰਤ ਹੋਰ ਥੋੜੇ ਜੇ ਤਾਤਾ ਅਲਗ ਲੜੀ ਗੋਲੀ